ਸਰੂਪ ਸੁਆਮੀ ਜੀ ਅਤੇ ਸਤਿਆਵਰਤ ਸੁਆਮੀ ਜੀ ਦਾ ਸੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਆਪਕਾ ਬਹੁਤ-ਬਹੁਤ ਧੰਨਵਾਦ ਜਿन्होने ਅਨਮੋਲ ਬਚਨੋ ਸੇ ਸਾਰੀ ਸੰਗਤ ਕੋ ਜੀ ਕੱਲ ਨੂੰ ਪੂਜਾ ਸ੍ਰੀ ਪ੍ਰਮukh ਸੁਆਮੀ ਜੀ ਮਹਾਰਾਜ ਜੀ ਦੀ ਜਨਮ ਦਿਨਤੀ ਹੈ ਤੇ ਉਹਦੇ ਵਾਸਤੇ ਆਪਾਂ ਅੱਜ ਹੀ ਦਿੰਨ ਮਿੰਟ ਵਾਸਤੇ ਆਪਾਂ ਸਾਰਿਆਂ ਨੇ ਨਾਮ ਸਿਮਰਨ ਕਰਨਾ ਹੈ ਸਾਰੇ ਜਣੇ ਪਿੰਡ ਡ੍ਰੌਪ ਸਾਇਲੈਂਸ ਤੇ ਬੈਠ ਕੇ ਸਾਰੇ ਜਣੇ ਨਾਮ ਕਰੋ ਪਹਿਲਾਂ ਤੇ ਉਸ ਤੋਂ ਬਾਅਦ ਜੋ ਅਗਲਾ ਪ੍ਰੋਗਰਾਮ ਹੈ ਸਾਡੇ ਰਾਗੀਆਂ ਦਾ ਉਹ ਸ਼ੁਰੂ ਹੋਏਗਾ ਜੀ ਜੋ ਨੀਜ਼ ਦਿਨ ਦੇ ਹਰੀ ਭਗਤਾਂ ਨੂੰ ਤੇ ਹੁਣ ਸਾਧ ਸਿੰਘ ਜੀ ਮੈਂ ਅੱਜ ਕਰਾਂਗਾ ਆ ਕੇ ਸਾਡੇ ਉਸਤਾਦ ਹਰਪਜਨ ਸਿੰਘ ਜੀ ਸੰਤ ਮੋਹਨ ਸਿੰਘ ਜੀ ਸੰਤ ਗੁਰシャン ਸਿੰਘ ਜੀ ਨਰਿੰਦਰਪਾਲ ਸਿੰਘ ਜੀ ਸਿੰਘ ਜੀ ਤੇ ਹੋਰ ਸਾਰੇ ਰਾਗੀ ਜੋ ਸਟੇਜ ਤੇ ਦਰਸ਼ਨ ਦੇ ਰਹੇ ਹਨ ਉਹ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਆਪ પ્રેમ ਪਿਆਰ ਦੇ ਨਾਲ ਇਹਨਾਂ ਦਾ ਕੀਰਤਨ ਸਰਵਣ ਕਰੋ ਦਾਸ ਫੇਰ ਤੋਂ ਸ੍ਰੀ ਆਤਮਾ ਸਰੂਪ ਸਵਾਮੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਆਪਣੇ ਅਨਮੋਲ ਬਚਨਾਂ ਦੇ ਨਾਲ ਸੰਗਤ ਨੂੰ ਨਿਹਾਲ ਕੀਤਾ ਤੇ ਦਰਸ਼ਨ ਦਿੱਤੇ ਹਨ ਸਾਸਿੰਘ ਜੀ ਆਪ ਜੀ ਕੀਰਤਨ ਸਰਵਣ ਕਰੋ ਜੀ ਸਾਸਿੰਘ ਜੀ ਮਹਾਰਾਜ ਜੀ ਦੀ ਜਨਮ ਦਿਨਤੀ ਹੈ ਤੇ ਸੰਗਤ ਵੱਲੋਂ ਇਸ ਤਰ੍ਹਾਂ ਵਿਚਾਰ ਹੋਈ ਸੀ ਕਿ ਉਹਨਾਂ ਨੂੰ ਇਥੋਂ ਫੁੱਲ ਭੇਜੇ ਜਾਣ ਜਿਸ ਵੇਲੇ ਸ੍ਰੀ ਆਤਮਾ ਸਰੂਪ ਸਵਾਮੀ ਜੀ ਅੱਗੇ ਅਰਜ਼ ਬੇਨਤੀ ਕੀਤੀ ਗਈ ਤੇ ਇਹਨਾਂ ਨੇ ਆਖਿਆ ਕਿ ਤੁਸੀਂ ਉਥੋਂ ਆ ਗਿਆ ਲੈ ਕੇ ਆਖਿਆ ਗਿਆ ਕਿ ਫੁੱਲ ਵਗੈਰਾ ਨਾ ਭੇਜੋ ਤੁਸੀਂ ਕੱਲ ਨੂੰ ਸਾਡੇ ਪਾਸ ਆਓ ਆਪਾਂ ਇਕੱਠੇ ਰਲ ਕੇ ਪ੍ਰਭੂ ਭਗਤੀ ਕਰਦੇ ਹਾਂ ਤੇ ਜੋ ਉਹਨਾਂ ਦੀ ਜਨਮ ਦਿਨਤੀ ਮਨਾਉਂਦੇ ਹਾਂ ਸਾਧ ਸੰਗਤ ਜੀ ਕੱਲ ਨੂੰ ਨੀਸਟਨ ਮੰਦਿਰ ਵਿਖੇ ਸ਼ਾਮ ਨੂੰ 5 ਵਜੇ ਪ੍ਰੋਗਰਾਮ ਸ਼ੁਰੂ ਹੋਏਗਾ ਆਪ ਸਾਰਿਆਂ ਅੱਗੇ ਅਰਜ਼ ਬੇਨਤੀ ਹੈ ਕਿ ਜਿੰਨੇ ਵੀ ਵੱਧ ਤੋਂ ਵੱਧ ਜਾ ਸਕੋ ਉਥੇ ਪ੍ਰੋਗਰਾਮ ਦੇ ਉੱਤੇ ਜਾ ਦਰਸ਼ਨ ਦਿਓ ਤੇ ਆਪਾਂ ਇਹਨਾਂ ਦੇ ਨਾਲ-ਨਾਲ ਕੇ ਸਾਰਿਆਂ ਨੇ ਉਹ ਪੁਰਬ ਮਨਾਉਣਾ ਹੈ ਬੜਾ ਆਪਜੀ ਪ੍ਰੇਮ ਨਾਲ ਕੀਰਤਨ ਸਰਵਣ ਕਰੋ ਬੈਰੀ ਸਸੰਗ ਜੀ ਸਤਿ ਸ੍ਰੀ ਅਕਾਲ ਅੱਜ ਸਵਾਮੀ ਜੀ ਦੇ ਵੀਦਰਸ਼ਨ ਹੋ ਰਹੇ ਨੇ ਔਰ ਇਸ ਸਮਾਗਮ ਜੋ ਰੂਪੀ ਦੀ ਯਾਦ ਵਿੱਚ ਹੋ ਰਿਹਾ ਜੋ ਕਿ ਬੜਾ ਹੁਣਹਾਰ ਤੇ ਪਿਆਰਾ ਬੱਚਾ ਸੀ ਔਰ ਸਿਆਨ ਪਰਵਾਰ ਹਰ ਸਾਲ ਉਹਨੂੰ ਯਾਦ ਕਰਦੇ ਨੇ ਉਹਦੀ ਯਾਦ ਵਿੱਚ ਅਸੀਂ ਸਾਰੇ ਸਵਾਗਤ ਕਰਦੇ ਹਾਂ ਪਰ ਸ਼ਬਦੇ ਕਦੀ ਵੀ ਇਹ ਕਹਿੰਦੇ ਨੇ ਵੀ ਉਸ ਤਰ੍ਹਾਂ ਦੇ ਨਹੀਂ ਪੜਨੇ ਜਿਹੜਾ ਕਿ ਵਿਰਾਗ ਦੇ ਸ਼ਬਦ ਨਹੀਂ ਪੜਨ ਦਿੰਦੇ ਔਰ ਅਸੀਂ ਹੁਣ ਤੁਹਾਡੇ ਸਾਹਮਣੇ ਇੱਕ ਸ਼ਬਦ ਜੋ ਕਿ ਬਹੁਤ ਪੁਰਾਣੇ ਸਟਾਈਲ ਦਾ ਜੋ ਸਤਗੁਰੂ ਦਾ ਹੁਕਮੇ ਤੁਰਪਤ ਛਟਾਇਲ ਸਾਡਾ ਹਿੰਦੁਸਤਾਨ ਦਾ ਸਭ ਤੋਂ ਪੁਰਾਣਾ ਗਾਣਾ ਜਿਹੜਾ ਹੈ ਖਿਆਲ ਤੋਂ ਪਹਿਲਾਂ ਤੁਰਪਤ ਸੀ ਉਹ ਤੁਰਪਤ ਜਿਹੜਾ ਹੈ ਸਾਡੇ ਗੁਰਬਾਣੀ ਚ ਵੀ ਗਾਇਆ ਜਾਂਦਾ ਉਹਦੇ ਕੁਝ ਮੈਂ ਜਿਹੜੇ ਗੁਰਬਾਣੀ ਦਾ ਸ਼ਬਦ ਸੀ ਗਾਉਣ ਚੱਲੇ ਆ ਉਹਦੇ ਮੈਂ ਤੁਹਾਡੇ ਸਾਹਮਣੇ ਅਰਜ ਕਰਨਾ ਉਹਦਾ ਉਹ ਸ਼ਬਦ ਸਖੀ ਨਾਲ ਵਸਾਂ ਆਪਣੇ ਨਾਹ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲੇਆ ਸੁਣ ਸਕੀਏ ਮੇਰੀ ਨੀਂਦ ਪਲੀ ਮੈਂ ਆਪ ਨੜਾ ਪਿਰ ਮਲਿਆ ਪ੍ਰਮ ਖੋਇਓ ਸਾਤ ਸਾਜ ਸੁਆਮੀ ਪ੍ਰਗਾਸ ਪਇਆ ਕੌਲ ਖਿលਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਡਲਿਆ ਇਹ राग भीमपलासी ਵਿੱਚ ਇੱਕ ਪਹਿਲਾ ਸੀ ਤਰਬਤ ਪੇਸ਼ ਕਰਾਂਗੇ ਔਰ ਉਮੀਦ ਹੈ ਸਾ ਸੰਗਤ ਬੜੇ ਪ੍ਰੇਮ ਪਿਆਰ ਨਾਲ ਸੁਣੀ ਗਈ ਏ